ਕਰ ਲਈਏ ਅਬ ਜੀ ਹਾਂ ਬਿਲਕੁਲ ਬਿਲਕੁਲ ਸੋਰਠਿ ਸੋਰਸ ਪੀਜੀ ਹੈ ਕਬਹੂ ਨਾ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਾ ਨਿਰਮਲ ਸੋਈ ਸੋਰਠਿ ਤੇਰਾ ਸੋਰਠਾ ਹੈ ਨਾ ਜੇ ਉਹਦੇ ਰਸ ਮਿਲ ਜਵੇ ਰਸ ਹੋਵੇ ਸੋਰਸ ਪੀਜੀ ਫੀਕਾ ਹੋਏ ਜੇ ਉਹ ਰੰਗ ਚੜ ਜਵੇ ਐਸਾ ਰਾਸ ਪੀ ਲਈਏ ਕਦੇ ਫਿੱਕਾ ਹੀ ਨਾ ਲੱਗੇ ਮਿੱਠਾ ਹੀ ਰਹੇ ਉਹ ਤਾਂ ਮਤਲਬ ਹੈ ਉਹ ਤੋਂ ਉਹਨਾਂ ਬੁੜੇ ਹੀ ਨਾ ਉਸ ਰਸ ਤੋਂ ਕਹੇ ਉਹ ਵਨ ਉਸ ਰਸ ਤੋਂ ਬਲਕਿ ਬਾਕੀ ਰਸ ਦੇ ਸਰਜਾ ਉਹ ਰਸੇ ਦੀਓ ਚੜੇ ਜੇ ਸੋਟ ਰਾਗ ਦੇ ਵਿੱਚ ਉਹ ਰਾਸ ਮਿਲੇ ਉਹ ਗਿਆਨ ਮਿਲੇ ਜਿਹੜੇ ਗਿਆਨ ਤੋਂ ਮਨ ਕਦੇ ਉਚਾਟ ਹੋਵੇ ਹੀ ਨਾ ਹਲਕੇ ਧੁਗੇ ਸਾਰੇ ਫਿੱਕੇ ਰਸ ਛੱਡਣ ਲੱਗ ਜਾਂ ਉਹਨਾਂ ਨੂੰ ਛੱਡ ਦਵੇ ਇਹ ਰਸ ਪੀਏ ਉਹ ਰਸ ਪੀਏ ਨਾ ਇਹ ਰਸ ਭਾਵਾਂ ਜਿਹੜੇ ਅੱਗੇ ਰਸ ਲੈਂਦਾ ਰਿਹਾ ਕੰਨ ਰਸ ਆਦਾਂ ਦੇ ਜੇ ਇਹ ਸੋਲ ਰਾਗ ਦੇ ਵਿੱਚੋਂ ਨਾਮ ਦਾ ਰਸ ਆਵੇ ਤਾਂ ਧੁਗੇ ਰਸ ਛੱਡ ਜਾਂਦਾ ਉਹ ਗੁਰਬਾਣੀ ਦਾ ਇੱਕ ਸੁਰੂਗਾ ਗੁਰਬਾਣੀ ਦਾ ਹੀ ਆਲ ਸੁਣੂਗਾ ਗੁਰਬਾਣੀ ਦਾ ਰਾਗ ਦੇ ਵਿੱਚ ਨਾ ਹਰਸਾ ਸੋਹਰੇ ਟਿੱਕਾ ਹੁਲਣਾ ਫਿਰ ਕਾ ਹੁੰਦੇ ਨਾਮ ਕੋ ਰਾਮ ਨਾਮ ਨੂੰ ਗੁਣ ਲਗਾਈ ਹੈ ਤਰਗਾ ਨਿਰਭਉ ਸੋਹਰੇ ਸੇ ਕਹਿੰਦੇ ਜੇ ਰਾਮ ਨਾਮ ਦਾ ਗੁਣ ਕਾਵੇ ਗਾਈ ਦਾ ਫੇਰ ਗਾਈ ਦਾ ਜਦੋਂ ਰਾਸਤਰੀ ਲਈਦਾ ਰਸ ਰਸਾਈ ਰਸਾਈ ਕੋਣ ਕਹਣਾ ਹੈ ਰਸੇ ਦਸੀਦਾ ਕੀ ਕਰਦਾ ਹੈ ਰਸ ਬਾਰੇ ਗਿਆਨ ਲਈਦਾ ਫਿਰ ਜੋ ਆਪਣੇ ਤੇ ਰਸਤਾ ਅਸਰ ਹੋਏ ਉਹੀ ਦਸੀਦਾ ਕਿਵੇਂ ਮਿਲਿਆ ਕਿਹਨੇ ਦਿੱਤਾ ਕਿਵੇਂ ਪ੍ਰਾਪਤ ਹੁੰਦਾ ਹੈ ਰਸ ਨੋਮ ਰਸ ਫਿਰ ਕੀ ਕਰਦਾ ਕਿਹਾ ਜਾਂਦਾ ਉਹਦਾ ਗਿਆਨ ਅਵਰਕਿਆ ਨਾਲਕ ਰਾਮ ਨਾਮ ਕੋਣ ਕਹੀਏ ਫੇਰ ਰਾਮ ਨਾਮ ਦੇ ਕੋਣ ਲਈਦੇ ਨੇ ਬਾਤ ਦੇ ਵਿੱਚ ਪਹਿਲਾ ਰਸ ਪੀਦਾ ਇਹਦਾ ਸਮਝੀਦਾ ਫਿਰ ਸਮਝਾਈਦਾ ਪਹਿਲਾਂ ਜਪੀਦਾ ਫਿਰ ਜਪਾਈਦਾ ਦਰਗਾਹ ਨਰਮਨ ਸੋਇ ਫਿਰ ਦਰਗਾਹ ਤੇ ਜਿਹੜੀ ਸੋਭਾ ਹੈ ਨਿਰਮਲ ਸੋਭਾ ਉਹ ਦਰਗਾਹ ਚ ਕਬੂਲ ਹੁੰਦੀ ਹੈ ਕੀਤੀ ਹੋਈ ਸੋਭਾ ਫਿਰ ਦਰਗਾਹ ਚ ਕਬੂਲ ਹੁੰਦੀ ਉਹਦੀ ਵਾਣਾ ਕਬੂਲ ਨਹੀਂ ਹੁੰਦੀ ਉਹ ਨਹੀਂ ਹੁੰਦੀ ਜੇ ਸੱਚੀ ਨਹੀਂ ਹੁੰਦੀ ਗੱਲ ਕਹੀ ਹੋਈ ਸੱਚੀ ਨਹੀਂ ਹੁੰਦੀ ਦਰਗਾਹ ਚ ਕਬੂਲ ਨਹੀਂ ਹੁੰਦੀ ਹਾਂਜੀ ਇਸ ਸੋਰਠੀ ਰਾਗ ਵਾਸਤੇ ਦੱਸਿਓ ਜੀ ਸੋਰਠੀ ਸੋਰਸ ਪੀਜੀ ਐ ਸੋਰਸ ਦੀ ਗੱਲ ਆ ਰਹੀ ਕੋਈ ਇੱਕ ਰਸ ਹੈ ਸੋਰਠੀ ਦਾ ਜਿਹੜੀ ਸਾਡੀ ਬੁੱਧੀ ਹੈ ਬੁੱਧੀ ਹੈ ਉਹ ਹਾਠ ਯੋਗ ਦੀ ਵਜਾਏ ਇਹ ਹੱਟ ਕਰੇ ਵੀ ਉਹ ਰਸ ਪਿਲ ਕਿਤੋਂ ਜਿਹੜਾ ਠਿੱਕਾ ਨਾ ਹੋਵੇ ਯਾਨੀ ਹਟ ਕਰਕੇ ਗੁਰਬਾਣੀ ਨੂੰ ਵਿਚਾਰ ਕੇ ਉਹ ਰਸ ਪੀ ਲਵੇ ਨਾਮ ਲੱਭ ਲਵੇ ਜਿੰਨਾ ਜੇ ਨਾਮ ਲੱਭਦਾ ਦੀ ਉਹਨੂੰ ਰੜਕਦੀ ਰਹੇ ਬਾਣੀ ਅਰਜੋਤੇ ਉਹ ਫਿਰ ਮਿੱਠਾ ਰਸ ਫੀਕਾ ਨਹੀਂ ਹੈ ਉਹ ਉਹ ਸੱਚ ਦਾ ਸਮਝ ਆ ਗਈ ਫਿਰ ਕੰਮ ਛੱਡਦਾ ਫਿਰ ਅੱਗੇ ਫਿਰ ਤਾਂ ਗਾਜ ਜਦ ਕਨਾਲਾ ਮਿਲ ਗਿਆ ਸਮੁੰਦਰ ਦਾ ਮੱਛੀ ਨੂੰ ਫਿਰ ਗਾਹੇ-ਗਾਹ ਜਾਊ ਕਿਸ ਨੂੰ ਕਿਉਂ ਹਣੂ ਠੀਕ ਹੈ ਜੀ ਤੇ ਹੈ ਗੱਲ ਉਹੀ ਚ ਸੋਰਠ ਰਾਗ ਆ ਜਿਵੇਂ ਮਾਰੂ ਰਾਗ ਦੀ ਗੱਲ ਹੋਈ ਐ ਮੈਂ ਸੋਰਠ ਰਾਗ ਦੀ ਗੱਲ ਹੋਈ ਐ ਹਾਂ ਉਹੀ ਸੋਰਠ ਰਾਗ ਦੀ ਗੱਲ ਹੋ ਆ ਗੱਲ ਆਗਾ ਦਾ ਨਾਮ ਤਾਂ ਬੁਰਾ ਨਾਮ ਰੱਖੇ ਨੇ ਰਾਗਾਂ ਦੇ ਠੀਕ ਹੈ ਜੀ ਵੀ ਅਸਰ ਕੀ ਹੋਣਾ ਚਾਹੀਦਾ ਇਹ ਦੱਸਿਓ ਜੇ ਅਸਰ ਨਹੀਂ ਐ ਵਿੱਚ ਨਾਮ ਨਹੀਂ ਐ ਤਾਂ ਰਾਗ ਕਹਦਾ ਠੀਕ ਹੈ ਜੀ ਹਲਾ ਹਲਾ ਤਾਂ ਰੋਗੀ ਕੇ ਇਲਾਜ ਨੂੰ ਤਾਂ ਜੋ ਰਾਗੀ ਰੋਗੀ ਸੋਈ ਨਾ ਰੰਗੇ ਨਾਲ ਦੇ ਬਾਹਲਾ ਵੀ ਕਹਤਾ ਰਾਗ ਕੱਲੇ ਰਾਗ ਨੂੰ ਤਾਂ ਰਾਗ ਤੋਂ ਹੈ ਜੀ ਰਾਗ ਮੰਦੀ ਚੜਨ ਉਹ ਕਹਗਾ ਆਪਣਾ ਲਾਪਦਾ ਚੱਲੋ ਪਰੇ ਠੀਕ ਹੈ ਜੀ ਅਜਿਹਾ ਮੰਨਦੇ ਵਿੱਚ ਪੁੱਛਦਾ ਠੀਕ ਹੈ ਜੀ ਇੱਥੇ ਪੰਜਵੇਂ ਸ਼ਲੋਕ ਦੀ ਸਮਾਪਤੀ ਹੈ ਜੀ ਹਾਂ ਆਪਾਂ ਫਿਰ ਅਗਲੇ